ਤਨਵੰਤਾ ਹੋਏ ਕਰ ਕਰ ਬਾਵੈ ਫਿਰ ਸਮਾਨ ਉਸ ਕੋ ਸੰਗ ਨਾ ਜਾਵੇ ਜੇ ਤਾਂ ਦੀ ਗੱਲ ਆਪ ਪਕਰ ਲੈਨੇ ਤਾਂ ਹੰਸਤਾ ਕੋਈ ਹੋਵੇ ਜੇ ਤਰ ਸਮਾਨ ਕੋਈ ਸੰਗ ਨਾ ਜਾਵੇ ਨਾਲ ਤਾਂ ਤੇਰੇ ਕੁਤੋਂ ਸਮਾਨ ਕਾ ਇਸ ਦੇ ਨਸ਼ੇ ਚ ਤੂੰ ਸਮਾ ਜੀਵਨ ਨੂੰ ਦੌ ਤੈਰਾ ਤਬ ਜਿੰਦਗੀ ਖਰਾਬ ਕਰਦਾ ਨਹੀਂ ਨਸ਼ੇ ਚ ਸ਼ਰਾਬ ਦੇ ਨਸ਼ੇ ਨੂੰ ਮਾੜਾ ਨਸ਼ਾ ਜੀ ਫਿਲਮ ਦੇ ਨਸ਼ੇ ਨੂੰ ਕਿਤੇ ਮਾੜਾ ਨਸ਼ਾ ਪੈਸੇ ਦਾ ਪਰ ਗਲਤ ਰੋਸ਼ਨੀ ਨਸ਼ਾ ਜੀਵਨ ਵਿਜੇਤ ਸਰੇ ਸ਼ਰਾਬ ਹੀ ਨਵੀਂ ਪੜਾ ਆਦਮੀ ਨੂੰ ਜਿੰਮੀ ਨਵੀਂ ਪੜਾ ਨਸ਼ੇ ਹੀ ਨਾ ਪੜਾ ਹੋ ਅਮਰੀਕਾ ਉਹ ਜਿਹਾ ਉਹਨਾਂ ਬਾਲ ਹਾਤ ਐਸੇ ਮੇਰੇ ਮਨ ਦਾ ਭਈਆ ਕੀ ਹੋਇਆ ਉਹਨੂੰ ਰਾਮ ਨੂੰ ਪਤਾ ਹੀ ਕੋਈ ਨਾਨੂਏ ਦਿਆ ਕਰਦੇ ਨਾ ਲੋਕ ਮਾਇਆ ਧਾਰੀ ਉਹਨਾਂ ਨੂੰ ਆਪ ਭੜੇ ਨੇ ਸਾਰੀ ਵੀਰ ਦੱਸੋ ਬਈ ਪੈਸੇ ਦਾ ਤੰਪੂਪ ਨਾ ਕਿੰਨੂੰ ਕਵਾਂਦੀ ਹੈ ਕਿੱਦਾਂ ਹੈ ਬੰਦੂ ਨੀ ਹੈ ਦੱਸੋ ਗੜਾ ਹੈ ਕੋਈ ਇਹ ਜਿੱਦਿਆ ਨਾ ਦੀ ਕੀਤੀ ਹੋਈ ਹੈ ਤਨਪੂਪ ਦਾ ਜੋ ਕਰੇਗਾ ਵਾਂ ਸੋ ਪੂਰ ਹੋ ਗਿਆ ਇਹ ਉਂਗਲੀ ਕਰੀਏ ਤੇ ਉਹਨਾਂ ਨੂੰ ਕੁਰਬਾਨੀ ਨਹੀਂ ਪੜੀ ਕਰਦੀ ਕਿਸੇ ਦੇ ਛੋਟੇ ਤੇ ਕਰਦੀ ਸਾਲਾਂ ਨਾਲੋਂ ਜ਼ਿਆਦਾ ਸੋ ਮੂਰਖਾਂ ਆ ਗਏ ਆ ਇਹ ਮੂਰਖ ਜਿੰਨੇ ਨੇ ਪਾਇਆ ਮਾਇਆ ਤੁਹਾਡੇ ਜ਼ਿਆਦਾ ਪੈਸਿਆਂ ਵਾਲੇ ਇਹ ਕਹਿੰਦਾ ਮੁੰਡੇ ਗਏ ਉਹ ਗਿਆ ਫਲਾਨ ਆ ਗਿਆ ਆਪਨੇ ਪਤਾ ਇਹਨਾਂ ਨੂੰ ਵੀ ਅਸੀਂ ਕੀ ਕਰੀ ਆਪਣਾ ਆਪਣ ਨੂੰ ਕੋਈ ਬੈਠੇ ਇਹ ਸਮਝਣੇ ਅਸੀਂ ਪੜੇ ਸਮਾਈ ਕਰਦੇ ਆ ਜੇ ਅਸੀਂ ਫੜਨਾ ਪੈਦਾ ਕਾਫੀਆਂ ਜੇ ਅਸੀਂ ਥੜਕਾ ਬਣਾਤੇ ਉਹ ਬਣਾਸ ਕੀ ਕਰਦਾ ਬਸ ਥੋੜੂ ਜਿਹਾ ਦਾਉ ਮੇਰਾ ਕੀ ਦਾਉ ਐਦਾਂ ਬਣਿਆ ਜਿਹੜਾ ਗਿਆ ਥੋੜਾ ਜਿਹਾ ਸੌਸ ਲੱਗ ਗਿਆ ਜੀਵਨ ਦੇ ਤਮੋਂ ਗਿਆ ਥੋੜੂ ਬੋਦਾ ਕੀ ਮਿਲਿਆ ਇਹ ਗਿਆਨ ਦੀਆਂ ਗੱਲਾਂ ਨੇ ਸਾਰੀਆਂ ਮੂਰਖਾਂ ਦੀਆਂ ਗੱਲਾਂ ਨੇ ਇਹ ਤਾਂ ਕੱਲ੍ਹੇ ਜਾਣਾ ਕੱਲ੍ਹੇ ਤਾਂ ਹੋ ਸਕਦਾ ਹੈ ਇਹ ਕੱਲ੍ਹ ਤੇਰੇ ਨਾਲ ਤਾਂ ਹੋ ਸਕਦਾ ਤਰੱਕੀ ਕਰਦੀ ਹੈ ਕਰਨਾ ਉਹ ਕਰਨਾ ਥੋਸਾਂ ਦਾ ਕੱਲ੍ਹ ਕਰਦੀ ਹੈ ਸ਼ੁਰੂ ਸਹੀ ਵੇਰ ਤੋਂ ਜੀ پوری ਚੰਗਾ ਤੇ ਜਾ ਕੇ ਚੰਗਾ ਰਹਿਣ ਤੇ ਉਹਨੇ 20000 ਕੰਪਲੀਟ ਤੇ ਦੁਨੀਆਂ ਇੰਤਹਾ ਯਾਦ ਆ ਰਹੀ ਹੋ ਗਈ ਪਤਾ ਹੀ ਕੁਝ ਨਹੀਂ ਸਾਰੇ ਜੇ ਮਾਇਆ ਧਾਰੀ ਹੋ ਗਏ ਤਾਂ ਜਿਹੜਾ ਕੈਕਟਰ ਸੀ ਉਹ ਵੀ ਚਲਾ ਕੇ ਦਿੰਦੇ ਪੱਖੋਂ ਵੀ ਰਿਹਾ ਐਸ ਤ ਕਾਦੀ ਨਹੀਂ ਜਬਾਨ ਨਹੀਂ ਲਿਹਾਜ ਨਹੀਂ ਰਹੀ ਤੇ ਨਾ ਸ਼ਰਮ ਨਹੀਂ ਰਹੀ ਸਾਰੇ ਗੋਦਾ ਤਲਾਸੂ ਜੀ ਪਤਾ ਨਹੀਂ ਕਿ ਦੋ ਘੱਟ ਲੈ ਲਿਆ ਨਾ ਸਾਰਾ ਕੋਈ ਚੁੱਪ ਗਿਆ ਜੀ ਹਾਂ ਆ ਮਾਇਆ ਨੇ ਗੋਤਾ ਸਾਰੇ ਕੋਈ ਸੋਦਾ ਮੂਰ ਤੁਸੀਂ ਕਹਿੰਦੇ ਸੀ ਬੜੇ ਲਿਖਿਆ ਤੇ ਮੂਰ ਖੰਡਾ ਗਿਆ ਨਹੀਂ ਤਾਂ ਇਹ ਕੁਝ ਕਰ ਦਿੰਦਾ ਜੋ ਕੁਝ ਹੋ ਰਿਹਾ ਹੈ ਉਹਦਾ ਇਲਾਜ ਨਹੀਂ ਹੁੰਦਾ ਹੁੰਦਾ ਜੇ ਅੱਗ ਲੱਗ ਗਿਆ ਬੰਦਰ ਅੱਗ ਲਾ ਰਿਹਾ ਹੈ ਬੁਝਾ ਨਹੀਂ ਸਕਦਾ ਅਗਦਾ ਲਾ ਲੂਗਾ ਸਿੰਘ ਦੇ ਤੇਲੀ ਤੁਂ ਜਲਾ ਦੇ ਕੋਲ ਉਹਨੂੰ ਪਤਾ ਲੱਗਿਆ ਐਂ ਗਲਤੀ ਜਲਾ ਦੂਗਾ ਉਹ ਦੂਗਾ ਵੀ ਮੁਝੇ ਹੀ ਹੋ ਰਿਹਾ ਤੇ ਇਹੋੜੀ ਨਹੀਂ ਘਬਰਾ ਕੇ ਭੱਜੀ ਜਾਂਦਾ ਉਹ ਮਾਰਦਾ ਐਵੇਂ ਇਹ ਬੱਜੇ ਫਿਰ ਤੇ ਹੱਥ ਪੱਲੇ ਮਾਰਦੇ ਬਲਾਸ ਕਰਕੇ ਮੈਂ ਹਟਣਾ ਓਕੇ ਮੈਂ ਹਟੇ ਜੇ ਪੈਦਾ ਕਿਉਂ ਹੋਏ ਨੇ ਦੇਖੋ ਆਪੋ ਕਿੱਥੋਂ ਪੁਜਾ ਇਹ ਸਪੈਕਟੂਲਰ ਜਾਂ ਕੇ ਨਾ ਜਾਏ ਇਹ ਤਾਂ ਸੰਜਨ ਇਹ ਜਾਏ ਆਪੋ ਕਿੱਥੋਂ ਪੁਜਾ ਕਰ ਸਟੂ ਇਹ ਆਏ ਉਪ ਜੇ ਕਿ ਇਲਾਜ ਕਰ ਲੋ ਫਿਰ ਦੇਖਾਂਗੇ ਪਹਿਲਾਂ ਇਹ ਤਾਂ ਕਰ ਲੋ ਡਾਇਗਨੋਸ ਪੈਦਾ ਕਿ ਮੂਹੀਆਂ ਕਿਉਂ ਪੈਦਾ ਹੋ ਗਏ ਸਾਡੇ ਦਿਮਾਗ ਦੇ ਵਿੱਚ ਨਾ ਕਿਹੜੀ ਕਮੀ ਸੀ ਇਹ ਅਸੀਂ ਜਾਣ ਰਹੇ ਹਾਂ ਉਹ ਇਲਾਜ ਕਰੋ ਉਸ ਦਾ ਇਲਾਜ ਕਰੋ ਬਿਆਹ ਸਹੀ ਜਨ ਨੇ ਮੂਰ ਇਕੱਠੇ ਹੋਏ ਨੇ ਵਿਦਵਾਨ ਇਹਦੇ ਦਾ ਕੋਈ ਨਹੀਂ ਦਾ ਕੋਈ ਨਹੀਂ ਦਾ ਕੋਈ ਨਹੀਂ ਦਾ ਗੋਸਪੀ ਹੀ ਕੋਈ ਨਹੀਂ ਇਹਨਾਂ ਨੂੰ ਕੀ ਕਰੀ ਕਿ ਗਿਆਨवान ਆਦਮੀ ਦੀ ਕਦਰ ਕੋਈ ਨਹੀਂ ਬਾਕੀ ਸਾਰੇ ਵਿਦਵਾਨ ਮੂਰ ਇਕੱਠੇ ਹੋਏ ਨੇ ਸਾਰੇ ਸਾਰੇ ਮੂਰ ਇਕੱਠੇ ਹੋਏ ਐਡੀ ਮੂਰ ਖਾ ਕੋਣ ਨਾ ਟਕਦਾਉਂਦੀ ਠਾਣੇ ਉਹ ਨਾਸਰ ਮਨੁੱਖ ਉੱਪਰ ਕਰੇ ਆਸ ਪਲ ਭੀਤਰ ਤੱਕਾ ਹੋਏ ਵਿਨਾਸ਼ ਬੜੀਆਂ ਬਹੁਤਾਂ ਆਸ ਇਹ ਆਸ ਨਾਲ ਵੀ ਇਹ ਸਾਡੇ ਮੌਕੇ ਤੇ ਕੰਮ ਆ ਜਾਣ ਪਲ ਭੀਤਰ ਤੱਕਾ ਹੋਏ ਵਿਨਾਸ਼ ਪਲ ਭੀਤਰ ਤੱਕਾ ਹੋਏ ਕਿ ਸਿੱਟ ਲੱਗਦਾ ਮਨ ਅੱਜ 24 ਡਿਗਰੀ ਹੋ ਟੈਂਪਰੇਚਰ ਚਲਣਾ ਜਦ ਸਾਰੇ ਸੌਂ ਜਾਂਦੇ ਉਹ 47 ਦਾ ਹੋ ਗਈ ਤੇ 58 ਚਲ ਗਈ ਸੀ ਡਿਗਰੀ ਨੂੰ ਕੀ ਲੱਗਦਾ ਸੀ ਕਿੰਨਾ ਗਿਆ ਲੱਗਦਾ ਪਾਲਪੀਸ ਦਾ ਕਾ ਹੋਏ ਬਨਾਸ ਉਹਨਾਂ ਕੋਲ ਜੇ ਲੱਗਦਾ ਜੋੜੋ ਸਭ ਤੇ ਆਪ ਜਾਣੇ ਬਲਵੰਤ ਵਿਖਲੇ ਹੋਏ ਜੈ ਕੁਸ਼ਮੰਤ ਸਭ ਦੇ ਪੈਸੋ ਗਨੇ ਕੀ ਹੋ ਗਿਆ ਕਹਿੰਦੇ ਕੋਈ ਨਹੀਂ ਸੌਂਪ ਹੋਏ ਨੂੰ ਟਕੜਾ ਬੈ ਜੀ ਹਾਂ ਨਾ ਬਰਾਦੀ ਟਕੜਾ ਛੱਡ ਬਵਾ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤੇਸ ਕਰੇ ਕੁਆਲੀ ਕਿਸੇ ਨਾ ਹੰਕਾਰੀ ਐਡਾ ਹੰਕਾਰੀ ਹੋਵੇ ਕਿਸੇ ਦੀ ਪਰਵਾਹ ਨਾ ਜਿਹੜਾ ਕਰੇ ਧਰਮ ਰਾਏ ਕਿਸ ਕਰੇ ਕੋ ਬڑے بڑے ਰਾਜ ਹੁੰਦੇ ਨੇ ਹੰਕਾਰੀ ਹੁੰਦੇ ਨੇ ਪਰਵਾਹ ਨਹੀਂ ਕਰਦੇ ਤੇ ਡਾਕੂ ਵੀ ਨੇ ਪਰਵਾਹ ਨਹੀਂ ਕਰਦੇ ਆ ਕਰਦਾ ਸਾਰਾ ਸਮਾਜ ਸਹੀ ਕਰਕੇ ਤਾਂ ਹੀ ਤੇ ਹੁੰਦੇ ਜੇ ਜਿਆਦਾ ਦਿਮਾਗ ਖਰਾਬ ਹੋਤਾ ਧਰਮ ਰਾਏ ਕੋ ਨਾ ਵੀ ਉਥੇ ਬਹੁਤ ਜੂਨਾ ਪਈਆਂ ਨੇ बहुत ਕਿਸਮ ਦੇ ਕੋ ਪੱਟੀਆਂ ਆ ਰੋ 베ਲਣੇ ਨੇ ਕੱਢੋ ਆ ਭੀੜੇ ਗੇ ਜਾਵਣ ਹਾਂਜੀ ਗੁਰਪ੍ਰਸਾਦ ਜਾ ਕੇ ਮਿਲੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਣ ਗੁਰਪ੍ਰਸਾਦ ਜਾ ਕੇ ਮਿਲੇ ਭਵਾਨ ਜੇ ਕੋ ਗਿਆਨ ਲੈ ਲਵੇ ਇਹ ਤਾਂ ਹੋ ਜਵੇ ਉਹ ਦਰਗਾ ਪਰਮਾਨ ਸੋਜਨ ਨਾਨਕ ਦਰਗਾ ਪਰਮਾਨ ਸੋਜਨ ਨਾਨਕ ਤਾਂ ਕਿਤੇ ਆਦਮੀ ਜਾ ਕੇ ਦਰਗਾਜ ਪਰਮਾਨ ਤਿਆਗ ਤੂੰ ਫਾਕੀ ਦੁਨੀਆ ਕਾ ਡਾਗ ਰੀਂਦੇ ਜੋ ਕਰੇਗਾ ਵਾਹ ਵਾਹ ਨੇ ਪਰਮਾਨ ਗੁਬਾਨ ਝੜ ਗੁਬਾਨ ਪਰਮਾਨੇ ਨਹੀਂ ਮਰਤੇ ਫੂਟ ਗੁਬਨਦੀ ਕਿਉਂ ਇਹ ਕਹਿੰਦਾ ਕਿ ਗੁਮਾਨ ਆਕਾਰ ਵਾਲੇ ਨੇ ਵਾਨ ਵਾਲੇ ਨੇ ਉਹ ਤਾਂ ਫੁੱਟ ਕੇ ਮਰਦੇ ਨੇ ਆਇਤਾ ਬ੍ਰੇਨ ਨੇ ਤਾਂ ਫੁੱਟ ਜਾਂਦਾ ਇਹਨੇ ਆਇਦੋ ਨਾ ਉਹ ਫੁੱਟਦਾ ਹੀ ਜਾਂਦਾ ਕੋਈ ਹੀ ਵੰਦਾ ਹੈ ਚ ਫੁੱਟਦਾ ਆਹੋ ਚੱਲਣਾਂ ਜਾਂ ਨੇ ਮਾਰਕੀ ਬੋਰਡ ਕਮਾਂਦੇ